ਸ਼ਲੋਕ ਮਹੱਲਾ ਪਹਿਲਾ ਰਾਗੀ ਜੂਠੀ ਝੂਠੀ ਵੇਦੀ ਜੂਠੀ ਨ ਚੰਦ ਸੂਰਜ ਕੀ ਭੇਦੀ ਤੇਰੀ ਇਹ ਗੱਲ ਹੈ ਬੋਲੀ ਹੋਈ ਗੱਲ ਹੈ ਨਾ ਜੇ ਰਾਗ ਵਿੱਚ ਬੋਲਦੀਏ ਤਾਂ ਇਹ ਝੂਠੀ ਨਹੀਂ ਹੋ ਜਾਂਦੀ ਜਿਵੇਂ ਘਰਬਾਣੀ ਰਾਗ ਵਿੱਚ ਹੈ ਰਾਗ ਚ ਪੜੀਏ ਤਾਂ ਵੀ ਝੂਠੀ ਨਹੀਂ ਜੇ ਉਦਾਂ ਪੜੀਏ ਤਾਂ ਵੀ ਝੂਠੀ ਦੀ ਸੱਚੀ ਬਾਣੀ ਸੁੱੱਚੀ ਬਾਣੀ ਤਾਂ ਸੁੱੱਚੀ ਹੋ ਰਹੂਗੀ ਦੇ ਨਪੇ ਜੇ ਬੇਦਾਂ ਦੇ ਕਿ ਹੋਈ ਹੈ ਬੇਦ ਗ੍ਰੰਥਾਂ ਵਿੱਚ ਲਿਖੀ ਹੋਈ ਗੱਲ ਹੈ ਤਾਂ ਬੇ ਕਾਗਜ਼ੇ ਕਈ ਲੋਕ ਇਹਨਾਂ ਕਾਗਜ਼ਾਂ ਨੂੰ ਫੇਰਾਂ ਨੂੰ ਸਿਆਹੀ ਨੂੰ ਸੱਚਾਈ ਸਮਝਦੇ ਐ ਵੀ ਗੱਲ ਗਲਤ ਹੈ ਕੱਲ ਨਹੀਂ ਝੂਠੀ ਹੋ ਜਾਂਦੇ ਦੇਖਾਂ ਜਾ ਕੇ ਕਾਗਜ਼ ਤੇ ਆ ਕੇ ਆ ਗਾਇ ਤੇ ਗੱਲ ਮਤਲਬ ਆ ਉਹੀ ਪੰਪਤੀ ਜੇ ਆਪਾਂ ਗੁਰਬਾਣੀ ਦੀ ਗਾਦੀਏ ਸੱਚੀ ਅਸੱਚੀ ਬਾਣੀ ਹੋਵੇ ਤਾਂ ਕਿਆ ਕਰ ਦਿੰਦੀ ਐ ਹਿਰਦੇ ਨੂੰ ਇਹ ਝੂਠੀ ਕਹਾਣੀ ਹੋ ਜੂਗੀ ਨਹੀਂ ਹੋ ਸਕਦੀ ਗੁਰਬਾਣੀ ਇਸ ਗੱਲ ਤੋਂ ਕਿ ਕਾਰੀ ਵੀ ਝੂਠੀ ਦੀ ਹੁੰਦੀ ਬਾਣੀ ਗਾਇਤੋਂ ਲਿਖੇ ਤੋਂ ਤੇਦੀ ਰਸਤਾ ਲਿਖੇ ਤੋਂ ਹਾਂਜੀ ਕਹਿਣ ਦਾ ਭਾਵ ਇਹ ਐ ਕਿ ਇਸਲਾਮ ਵਾਲਿਆਂ ਨੇ ਜੇ ਰਾਗ ਚ ਨਹੀਂ ਲਿਖੀ ਐ ਅਸੀਂ ਰਾਗ ਚ ਲਿਖਤੀ ਐ ਤਾਂ ਇਹਦੀ ਕੋਈ ਉਹਦਾ ਰਾਗ ਉਹ ਗੋੜਾ ਬੁੱਧ ਵਾਲੇ ਤੁਹਾਨੂੰ ਵਾਹ ਇਹ ਸ਼ਾਦ ਕੋਟੀ ਦੀ ਦਾ ਗਏ ਸੁਨਾਨ ਕਿਹੜਾ ਸੁਣਾਇਆ ਹਾਂਜੀ ਝੂਠੀ ਚੰਦ ਸੂਰਜ ਕੀ ਭੇਦੀ ਚੰਦ ਸੂਰਜ ਨੂੰ ਭੇਦਣ ਵਾਲੀ ਜਿਹੜੀ ਗੱਲ ਹੈ ਚੰਦ ਸੂਰਜ ਨੂੰ ਦੁਹਾਨੇ ਭੇਦ ਦਦੀ ਹੈ ਚੰਦ ਸੂਰਜ ਦੇ ਭੇਦ ਖੋਲਣ ਵਾਲੀ ਜਿਹੜੀ ਗੱਲ ਹੈ ਝੂਠੀ ਕਿਵੇਂ ਹੋ ਸਕਦੀ ਯਾਨੀ ਜੇਕਰ ਮੰਨਤੇ ਦੁਹਾਨੇ ਅਸਰ ਤੇ ਤੇ ਘੜੀਏ ਸੁਰਤ ਮਤਮਨ ਖੁਦ ਇਹ ਤਾਂ ਚੰਦ ਸੂਰਜ ਨੂੰ ਭੇਦ ਦਦੀ ਹੈ ਜਿਹੜਾ ਸਾਨੂੰ ਖਾ ਦੂਗੀ ਇਹ ਚੰਗੀ ਗੱਲ ਨਹੀਂ ਹੈ ਉਹ ਨੂੰ ਨਵਜੰਦਰ ਚੰਦਰ ਕਹੇ ਚੇਤਨ ਜਿਹੜਾ ਹੈ ਚੰਦਰ ਉਹ ਇਹ ਚੰਦਰਵੇਂ ਤੋਂ ਨੂੰ ਰੋਸ਼ਨੀ ਦੇਣ ਵਾਲਾ ਹੈ ਇਹ ਚੰਦਰਵੇਂ ਤੋਂ ਉਹਦਾ ਪੈਦਾ ਕੀਤਾ ਹੈ ਚੇਤਨ ਨਾ ਕੋਸੂਰ ਦੀ ਗੱਲ ਕਰਦੇ ਹਾਂ ਚੇਤਨ ਦੀ ਗੱਲ ਕਰਦੇ ਹਾਂ ਉਹੂ ਸੂਰਜਾ ਚੰਦਰਵੇਂ ਨਾਲ ਜਦ ਆ ਬਰਾਬਰੀ ਦੀਆਂ ਤਸ਼ਵੀਰਾਂ ਦੇਓ ਤਾਂ ਆ ਸੂਰਜ ਜਿਨੀ ਉਤੇ ਉਹਦਾ ਅਰਥ ਹੈ ਇਹ ਇਹਦੀ ਬੇਜਾ ਸਕਦੇ ਉਹ ਬੇਦੇ ਜਾ ਸਕਦੇ ਨੇ ਕੰਦਲ ਸੂਰ ਜਿਹੜੇ ਪਿੱਛੇ ਜਾ ਸਕਦੇ ਨੇ ਉਹ ਚੇਤਨ ਨੇ ਜਾ ਸਕਦਾ ਚਲ ਨਾਸਤਿਕ ਹੋ ਜਾਣਗੇ ਜਿੱਥੇ ਇੱਧਰ ਜਾ ਸਕਦੇ ਤੇ ਇੱਧਰ ਜਾ ਸਕਦੇ ਆ ਆਦਮੀ ਦੇ ਵਸਤੇ ਨਾ ਅੰਨੀ ਨਾ ਮਹੀ ਵਰੀਏ ਥਾਈ ਇਹ ਜਿਹੜਾ ਝੂਠ ਹੈ ਇਹ ਸੋਚਾ ਹੈ ਅੰਧ ਜਿੱਦੇ ਦੇ ਕਈਆਂ ਨਾਲ ਉਹ ਮੰਨਦੇ ਨੇ ਕਈਆਂ ਨਾਲ ਇਹ ਅਪਵਿੱਤਰ ਬੁੱਧੇ ਨੇ ਇਹਦੇ ਵਿੱਚ ਨਹੀਂ ਝੂਠ ਫਸੀ ਹੋਈ ਇਹਨਾਂ ਦੇ ਵਿੱਚ ਨਾਈ ਗਿਆਨ ਜਿਹੜੇ ਨੇ ਇਹ ਵੀ ਝੂਠੇ ਹਨ ਮਾਇਆ ਦਾ ਗਿਆਨ ਦਾ ਗਿਆਨ ਹੈ ਦਾ ਗਿਆਨ ਜਦੋਂ ਦਾ ਗਿਆਨ ਹਾਂਜੀ ਝੂਠੀ ਨਾ ਮੀਂਹ ਵਰ੍ਹਿਆ ਸਭ ਥਾਈ ਥਾਰੇ ਥਾਈ ਮੀਂਹ ਵਰ ਜਾਂਦਾ ਹੈ ਇਹ ਥੋੜੀ ਹੈ ਇੱਥੇ ਇਹਦੇ ਨਾਲ ਝੂਠ ਥੋੜੀ ਲੱਗ ਗਈ ਸਾਰਾ ਪਾਣੀ ਜਦੋਂ ਰੜ ਕੇ ਇਕੱਠਾ ਹੋ ਕੇ ਵੱਡਾ ਸੰਤ ਹੁੰਦਾ ਨਾ ਕਿਤੇ ਵੀ ਜਾ ਕੇ ਪ੍ਰਚਾਰ ਕਰੇ ਅਸੰਤਾਂ ਦੇ ਵਿੱਚ ਉਹ ਅਸੰਤ ਨਹੀਂ ਬਣਦਾ ਜੇ ਉਹ ਸੰਤ ਨਹੀਂ ਬਣਦੇ ਤਾਂ ਸੰਤ ਨੇ ਹੀ ਕੋਟਕ ਮਿਲਿਆ ਸੰਤ ਗੁਰਮੁਖਵਾਨ ਨੂੰ ਕਾਹਚ ਕਰਕੇ ਮਾਨੂੰ ਘਰੀ ਵਰਜੋ ਤਾ ਯੂਟਾ ਦੀ ਵਰਜੋ ਹਾਂਜੀ ਜੂਠੀ ਨਾ ਪਾਉਣੇ ਮਾਹੇ ਸਮਾਣੀ ਹਾਂ ਝੂਠ ਜਿਹੜੀ ਹਵਾ ਜਿ ਸਰੂਰੀ ਹੈ ਇਹ ਹਵਾ ਦੇ ਵਿੱਚ ਜੂੜ ਸਰਵਾਜਵੇ ਸਾਰੇ ਸਾਹ ਲੈਂਦੇ ਨੇ ਉਹ ਚੋ ਕੱਢ ਕੇ ਇੱਕ ਦੂਰੇ ਦੇ ਫੇਰ ਤਾਂ ਹਵਾ ਤੇ ਫਿਰ ਜਿਹੜੇ ਪੰਡਤ ਨੇ ਆਪਣੇ ਆਪ ਨੂੰ ਸੱਚਾ ਕੋ ਜਨ ਵਾਲੇ ਨੇ ਸੋਲ ਪਾਕੀ ਨੇ ਬਵੇਕੀ ਨੇ ਇਹਨਾਂ ਨੂੰ ਹਵਾ ਕੇ ਦਵਾਉਂਗੀ ਹਵਾ ਦਾ ਝੂਠੀ ਹੈ ਸਾਰੀ ਉਹ ਹਰ ਸਾਲ ਆ ਲੈਂਦਾ ਉਹ ਤਾਂ ਹੀ ਸਾਲ ਹੈ ਤਾਂ ਉਹ ਬਿਚੇ ਰੜੀ ਜਾਂਦੀ ਹੈ ਇਹ ਵੀਰੇ ਹਵਾ ਕਤੋਂ ਲੈ ਜਾਵਾਂਗੇ ਪਰ ਹਵਾ ਹੀ ਉਠੀ ਹੋਗੀ ਸਾਰੀ ਪਾਣੀ ਹੀ ਹੋ ਗਿਆ ਸਾਰਾ ਇਹ ਜੂੜ ਸੋਚ ਜਿਹੜੀ ਆਦਮੀ ਦੀ ਥੋੜੀ ਬੁੱਧੀ ਵਾਲਿਆਂ ਥੋੜੀ ਅਕਲ ਵਾਲਿਆਂ ਦੀਆਂ ਗੱਲਾਂ ਨੇ ਬਣਾ ਜੂੜ ਸੋਚ ਗੁਰਬਾਣੀ ਇਹ ਤੋਂ ਬਾਹਰ ਖੜੀ ਹੈ ਸਰਵ ਵਿਆਪਕ ਗਿਆਨ ਜਦ ਜਦ ਖੁੱਲ ਜਾਂਦੀ ਹੈ ਨਾ ਫੇਰ ਇਹ ਗੱਲਾਂ ਸਭ ਚਲਦੀਆਂ ਨੇ ਕੋਲ ਬੁੱਧੀ ਆ ਬਹੁਤ ਛੋਟੀ ਬੁੱਧੀ ਆ ਜਿਹੜੇ ਜੂੜ ਸੋਚ ਬਣਦੇ ਨੇ ਜਦੋਂ ਬੈਗ ਨੂੰ ਬੈਗ ਵਾਲੇ ਕੋਲ ਨੇ ਜੋੜ ਸੱਚੇ ਸਾਡੇ ਨੇ ਨੇ ਮਾਹਮਾ ਚ ਵੀ ਬੰਦੇ ਇਹ ਤਾਂ ਪੰਡਤ ਦੀ ਤੇ ਜੋੜ ਸੱਚੇ ਕੁਰਬਾਨੀ ਇਨਕਾਰ ਕੀਤਾ ਹੋਇਆ ਹਾਂਜੀ ਨਾਨਕ ਨਹੀਂ ਗੁਰਿਆਂ ਗੁਣ ਨਾਹੀ ਕੋਏ ਮੂੰਹ ਫੇਰੀਐ ਮੂੰਹ ਝੂਠਾ ਹੋਇ ਨਾਨਕ ਕਹਿੰਦਾ ਜਿਹੜੇ ਨਿਗਰੇ ਨੇ ਜਿਹਨਾਂ ਨੇ ਗਿਆ ਰੀ ਲਿਆ ਗੁਰਮਤ ਨਹੀਂ ਦਾਦ ਕੀਤੀ ਉਹਨਾਂ 'ਚ ਕੋਈ ਗੁਣ ਨਹੀਂ ਹੁੰਦਾ ਉਹ ਜਿਆ ਕੱਲਾ ਫੇ ਬਣਾ ਲੈਂਦੇ ਸਨ ਆ ਜੀ ਅਸੀਂ ਪਸੋਂ ਪਾਕੀਆਂ ਸੀ ਉਹ ਆ ਇਹ ਨੂੰ ਐਉਂ ਬੜਾ ਹਥਿਆਰ ਬਣਾ ਲੈਂਦੇ ਸੀ ਭਗਤਾਂ ਅਸੀਂ ਤੇ ਖਾਂਦੇ ਆਪ पका ਖਾਂਦੇ ਹੋ ਦਾ ਨਹੀਂ ਖਾਂਦੇ ਜਿਹੜੇ ਦਾਦੀ ਖਾਂਦੇ ਅਸਲ ਦੇ ਵਿੱਚ ਉਹਨਾਂ ਕੋ ਮੈਂ ਗਿਆਨ ਨਹੀਂ ਲਿਆ ਹੋਇਆ ਗਿਆਨ ਉਹਨਾਂ ਕੋ ਹੈ ਨਹੀਂ ਸੁਪੀਰੀਅਰ ਹੋਣਾ ਦੂਜਿਆਂ ਨੂੰ ਬਣਾ ਬਣ ਕੇ ਸੁਪੀਰੀਅਰ ਬਣਨ ਦਾ ਬਹਾਨਾ ਘੜਿਆ ਹੈ ਉਹਨਾਂ ਅਸਲ ਵਿੱਚ ਝੂਠਾ ਕੌਣ ਹੈ ਝੂਠ ਕਾਹਦਾ ਹੈ ਝੂਠਾ ਕਦ ਹੁੰਦਾ ਹੈ ਮੂੰਹ ਫੇਰਿਆ ਮੂੰਹ ਝੂਠਾ ਹੋਏ ਜਿਨ੍ਹਾਂ ਨੇ ਸੱਚ ਤੋਂ ਮੂੰਹ ਫੇਲ ਲਿਆ ਗੁਰਬਾਨੀ ਦੇ ਸੱਚ ਤੋਂ ਉਹਨਾਂ ਦਾ ਮੂੰਹ ਝੂਠਾ ਹੋਗੇ ਮੂੰਹ ਤਾਂ ਮੈਨੂੰ ਝੂਠਾ ਜੇ ਮੂੰਹ ਵਿੱਚ ਕੋਈ ਚੀਜ਼ ਪਾ ਲਈ ਉਹ ਹੋ ਜਾਂਦੀ ਹੈ ਮੂੰਹ ਚੁਗਲ ਪਾ ਲਈ ਉਹ ਝੂਠੀ ਹੋ ਜਾਂਦੀ ਹੈ ਇਹ ਝੂਠਾ ਕੀ ਹੈ ਉਹ ਝੂਠੇ ਨੂੰ ਨਹੀਂ ਪਾਣੀ ਪੀਂਦੀ ਇਹ ਝੂਠਾ ਕੀ ਹੈ ਜਿਹੜਾ ਗੁਰਬਾਨੀ ਦਸਦੀ ਮੂੰਹ ਫੇਰਿਆ ਮੂੰਹ ਝੂਠਾ ਹੋਏ ਜੇ ਮੂੰਹ ਫੇਰ ਲਵੇ ਉਹ ਝੂਠ ਬੋਲੂਗਾ ਸੱਚ ਬੋਲੇ ਨਹੀਂ ਸਕਦਾ ਸੱਚ ਤੋਂ ਮੂੰਹ ਫੇਰ ਕੇ ਜੋ ਕਥਾ ਕਰੂ ਬਾਰਤਾ ਕਰੂ ਜਿਹਨਾਂ ਨੇ ਨੇ ਜੋ ਕੁਝ ਲਿਖਿਆ ਸਭ ਝੂਠ ਹੈ ਉਹ ਨਹੀਂ ਤਾਂ ਉਹਨਾਂ ਦੇ ਗ੍ਰੰਥ ਪੜ੍ਹ ਗੁਰਬਾਣੀ ਤੂੰ ਫੇਰਿਆ ਹੈ ਉਹ ਫੇਰਿਆ ਵੈਸੇ ਤਾਂ ਨਕਲ ਕੀਤੀ ਉਹਨੇ ਆਪਣੇ ਕੋਲੋਂ ਕੁਝ ਲਿਖਿਆ ਦੀ ਪਹਿਲਾਂ ਠੀਕਾ ਹੈਗਾ ਸੀ ਉਹਦੀ ਨਕਲ ਕਰਤਾ ਲਈ ਜਿਹਨੇ ਪਹਿਲਾਂ ਲਿਖਿਆ ਉਹ ਵੀ ਝੂਠਾ ਹੀ ਸੀ ਠੀਕ ਹੈ ਜੀ ਹਾਂ ਦਾ ਭਾਵ ਹੈ ਵੀ ਸੱਚ ਨਾਲੋਂ ਮੂੰਹ ਫੇਰਨ ਨਾਲ ਝੂਠਾ ਹੁੰਦਾ ਆਹ ਸੱਚ ਨਾਲੋਂ ਮੂੰਹ ਫੇਰਿਆ ਸਭ ਝੂਠਾ ਝੂਠਾ ਜਿਹਨੂੰ ਅਸੀਂ ਝੂਠ ਕਹਿੰਦੇ ਆ ਉਹਨੂੰ ਗੁਰਬਾਣੀ ਝੂਠ ਕਹਿੰਦੀ ਹੈ ਕਹਿ ਲਓ ਠੀਕ ਹੈ ਕੋਈ ਵੀ ਚੀਜ਼ ਝੂਠੀ ਸੱਚੀ ਨਹੀਂ ਹੈ ਮਾਇਆ ਦਾ ਸਾਰੀ ਝੂਠੀ ਹੈ ਛੁੱਤੇ ਤੇ ਹੈ ਠੀਕ ਹੈ ਪਰ ਫੇਰ ਵੀ ਜਿਹੜੇ ਲੋਕ ਮੰਨਦੇ ਐ ਵੀ ਚੀਜ਼ ਝੂਠੀ ਹੈ ਕਿਸੇ ਦਾ ਸਾਹ ਲਿਆ ਹੋਇਆ ਉਹ ਵੀ ਤਾਂ ਉਹਦੀ ਹਵਾ ਬਾਅਦ ਚ ਉਹ ਲੈ ਰਹੇ ਆ ਜਿੰਨਾ ਅੱਗਨ ਹੈ ਸ਼ੁੱਕਰ ਹੈ ਸਭ ਹਵਾ ਦੇ ਵਿੱਚ ਨਾ ਤੇ ਮੈਂ ਹਵਾ ਦੇ ਵਿੱਚ ਹੀ ਨਾ ਠੀਕ ਹੈ ਜੀ ਪਾਣੀ ਦਾ ਵੀ ਇਹੀ ਹੈ ਵੀ ਜੇ ਉੱਪਰ ਥੋਟੋਂ ਸ਼ਹਿਰ ਹੈਗਾ ਉਹਨਾਂ ਨੇ ਪਾਣੀ ਜੋ ਵੀ ਵਰਤ ਕੇ ਤੁਹਾਨੂੰ ਦਿੱਤਾ ਤੁਸੀਂ ਉਹੀ ਵਰਤ ਰਹੇ ਹੋ ਬਿਲਕੁਲ ਬਿਲਕੁਲ ਸਾਫ ਤਾਂ ਕੀਤਾ ਜਾ ਸਕਦਾ ਹੈ ਇਹਦੇ ਵਗੈਰਾ ਕੱਢੇ ਜਾ ਸਕਦੇ ਆ ਪਰ ਝੂਠਾ ਸੁੱਚੇ ਦੀ ਗੱਲ ਨਹੀਂ ਹੈ ਜੀ ਝੂਠੇ ਸੱਚ ਦੀ ਗੱਲ ਨਹੀਂ ਜੀ ਠੀਕ ਹੈ ਜੀ ਆ ਤੁਸੀਂ ਕਲੋਰੀਨ ਪਾ ਕੇ ਇਹਦੇ ਜੋ ਬੈਕਟੀਰੀਆ ਮਾਰ ਸਕਦੇ ਹੋ ਤਾਂ ਕਿ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਆ ਪਰ ਉਹ ਝੂਠਾ ਸੁੱਚੇ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਮਹੱਲਾ ਪਹਿਲਾ ਨਾਨਕ ਚੂਲੀਆਂ ਸੁੱਚੀਆਂ ਜੇ ਭਰ ਜਾਣੇ ਕੋਈ ਸੁਰਤੇ ਚੂਲੀ ਗਿਆਨ ਜੋਗੀ ਕਾ ਜਤ ਨਾ ਨਕ ਚੂੜੀਆਂ ਸੋਚੀਆਂ ਚੂੜੀਆਂ ਛੱਡ ਦੇਣਾ ਬ੍ਰਾਹਮਣ ਚੂੜੀ ਛਡਾਉਂਦੇ ਨੇ ਉਹ ਚੂੜੀਆਂ ਝੂਟੀਆਂ ਛਡਾਉਂਦੇ ਨੇ ਸੋਚੀਆਂ ਨਹੀਂ ਛਡਾਉਂਦੇ ਸੋਚਾ ਉਹ ਸੱਚ ਨਾਲ ਹੁੰਦੀ ਹੈ ਸੱਚ ਹੋਵੇ ਤਾਂ ਸੱਚ ਪਾਈਏ ਜੇ ਸਿਰ ਦਾ ਸੋਚਾ ਹੋਊ ਸੱਚ ਤਾਂ ਪਊਗਾ ਹਾਂ ਦਾ ਸੱਚ ਨਾਲ ਸੰਬੰਧ ਝੂਠ ਦਾ ਝੂਠ ਨਾਲ ਸੰਬੰਧ ਹੈ ਜੇ ਇਹਦਾ ਝੂਠਾ ਸੋਚਾ ਨਹੀਂ ਹੈ ਸੋਚੇ ਦਾ ਉਲਟਾ ਝੂਠਾ ਹੁੰਦਾ ਜੇ ਉਹਦਾ ਮਨ ਝੂਠਾ ਹੈ ਤਾਂ ਝੂਠ ਵੀ ਹੈ ਉਹਦੇ ਵਿੱਚ ਜੇ ਮਨ ਸੱਚਾ ਤਮਖ ਦੇ ਵਿੱਚੋਂ ਵੀ ਸੱਚੇ ਨਿਕੜੂਗਾ ਨਾਨਕ ਚੂੜੀਆਂ ਸੁੱਚੀਆਂ ਜੇ ਪਰ ਜਾਣੇ ਕੋਈ ਪਰ ਜੇ ਕੋਈ ਭਰਨਾ ਜਾਣਦਾ ਹੋਵੇ ਚੂੜੀਆਂ ਤਾਂ ਸੁੱਚੀਆਂ ਨੇ ਚੂੜ ਕਿਵੇਂ ਭਰਦੀ ਐ ਕਿੱਥੋਂ ਭਰਦੀ ਐ ਕਾਦੀ ਚੂੜੀਆਂ ਦਾ ਨਾਮ ਨਹੀਂ ਆਉਂਦੀ ਇਹਦੇ ਬਸ ਅਧਰਤ ਹਉ ਨਾ ਕਾਹੀ ਚੂੜੀਆਂ ਦੋ ਜੇ ਹਿਰਦੇ ਵਿੱਚ ਨਾਮ ਆਏਗਾ ਤਾਂ ਉਪਦੇਸ਼ ਤੋਂ ਹੋ ਜਾਵੇ ਭਰੂ ਉਹਦੀਆਂ ਤਾਂ ਹੀ ਸੱਚਾ ਹੋਊ ਸੁਰਤੈ ਚੂਲੀ ਗਿਆਨ ਕੀ ਆ ਦੇਖੋ ਸੁਰਤੈ ਨੂੰ ਕੀ ਦਿੱਤੀ ਹੈ ਚੂਲੀ ਸੁਰਤਾ ਕੌਣ ਹੈ ਸੁਰਤਾ ਜਿਹੜਾ ਜਾਗਦਾ ਹੈ ਜਾਗਿਆ ਜਿਹਦੀ ਸੁਰਤ ਦਿਖਾਣੇ ਆਈ ਹੈ ਸੁਰਤਾ ਸੁਪਨੇ ਜੀ ਫਿਰਦੀ ਹੈ ਸੁਪਨੇ ਵਾਲਾ ਸੁਰਤਾ ਨਹੀਂ ਹੁੰਦਾ ਸੁਰਤਾ ਉਹ ਸੁਣਨ ਵਾਲਾ ਧਿਆਨ ਨਾਲ ਧਿਆਨ ਨਾਲ ਸੁਣਨ ਵਾਲਾ ਸੁਰਤਾ ਹੈ ਉਹਨੂੰ ਕੀ ਹੈ ਉਹਨੂੰ ਕੀ ਚੂਲੀ ਮਿਲਣੀ ਹੈ ਗਿਆਨ ਦੀ ਚੂਲੀ ਚਾਹੀਦੀ ਹੈ ਸੁਰਤਾ ਚੂਲੀ ਗਿਆਨ ਕੀ ਜੋ ਜਿਹੜਾ ਹੈ ਧਿਆਨ ਲਾਉਂਦਾ ਜੋਗੀ ਦਾ ਜਤ ਹੋਏ ਜੋਗੀ ਦਾ ਜਤ ਜਤਨ ਜਤਨ ਦੇ ਨਾਲ ਜੇ ਉਹਦਾ ਮਨ ਗਿਆਨ ਜੋਗੀ ਬਣਾ ਰਿਹਾ ਮਨ ਰੋਕਣ ਵਾਸਤੇ ਤੇ ਸੁਰਤਾ ਜਿਹੜਾ ਗਿਆਨ ਨੂੰ ਚੂੜੀ ਬਣਾ ਰਿਹਾ ਦੋਨੋਂ ਕਰਕੇ ਗਿਆਨ ਦਾ ਵੱਧ ਬਣਦਾ ਹੈ ਸੁਰਤੇ ਕਾਮਯਾਬ ਹੋਏ ਨੇ ਬਲੂਟ ਕੌਣ ਜੋਗੀ ਕਾਮਯਾਬ ਨਹੀਂ ਹੋਏ ਹਾਂਜੀ ਕਿ ਜਿਹੜਾ ਆਪਾਂ ਸ਼ਲੋਕ ਦੀ ਪੰਕਤੀ ਪੜ੍ਹਦੇ ਸੀ ਸੁੱਚ ਹੋਵੇ ਤਾਂ ਸੱਚ ਪਾਈਐ ਜੇ ਤਾਂ ਆਪਾਂ ਸੁੱਚ ਹੋਵੇ ਤਾਂ ਤੇ ਰੁਕ ਜੀਏ ਜੇ ਤਾਂ ਤੇ ਵਿਸ਼ਰਾਮ ਲਾ ਦੀਏ ਜੇ ਆਪਾਂ ਪਹਿਲਾਂ ਲਾ ਲੀਏ ਵਿਸ਼ਰਾਮ ਫੇਰ ਮਨ ਮੁਖਾਂ ਦੇ ਅਰਥ ਹੋ ਜਾਣੇ ਸੁੱਚ ਹੋਵੇ ਪਹਿਲਾਂ ਸੁੱਚ ਹੋ ਤਾਂ ਸੱਚ ਮਿਲੂਗਾ ਇਹ ਗੱਲ ਨਹੀਂ ਹੈ ਸੱਚੇ ਹੋ ਕੇ ਸੁੱਚ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਇਹ ਗੁਰਮਤ ਜੇ ਸੋਚਿਆ ਅੰਦਰ ਸੱਚ ਦੀ ਭੁੱਖ ਹੋਊਗੀ ਕਾਂ ਸੱਚ ਲਊਗਾ ਪ੍ਰਾਪਤੀ ਜੇ ਅੰਦਰ ਲੋੜੇ ਨਹੀਂ ਆ ਤੁ ਸੱਚ ਦੀ ਸੱਚ ਦੀ ਸੱਚਾ ਹਲ ਦਾ ਕਰਨਾ ਚਾਹੁੰਦੇ ਨਹੀਂ ਫਿਰ ਉਹਨਾਂ ਸੱਚ ਕਾ ਸੁਣਣ ਫਿਰ ਤਾਂ ਉਹ ਅਖਰੀ ਅਰਥ ਕਰੂਗਾ ਆ ਜਿਹੜੇ ਬਾਹਰਲੇ ਅਰਥ ਨੇ ਛਾਛ ਪੀਏ ਸੰਸਾਰ ਸਰਦਾਰੀ ਆ ਛਾਛ ਪੀਊਗਾ ਨਾਮਧਰਨੇ ਕੀ ਲੜ ਇਹ ਵਿਸ਼ਰਾਮ ਜਿਹੜਾ ਹੈਗਾ ਇਹ ਆਪਾਂ ਨੂੰ ਸਿੱਖਾਂ ਤੋਂ Hindu ਵੀ ਬਣਾ ਸਕਦਾ ਜੇ ਆਪਾਂ ਗਲਤ ਵਰਤ ਲਈ ਹਾਂ ਜੀ ਬਿਕਾਮ ਵੀ ਸਾਰੀ ਗੱਲ ਇਹ ਹੈ ਖੰਨਾ ਤੇਖੀ ਬਾੜੋਂ ਨਿੱਕੀ ਦਾ ਕੀ ਮਤਲਬ ਹੈ ਇਹ ਉਲਟਾ ਵੀ ਅਸਰ ਹੋਵੇ ਤੇ ਵਿਸ਼ਰਾਮ ਤਾਂ ਹਿੰਦੂ ਬਣ ਜਾਂਨੇ ਆ ਕਿ ਕਿ ਕਹਿੰਦੇ ਤਾਂ ਹੋਊ ਜੇ ਪਹਿਲਾਂ ਤੂੰ ਸੁੱਚਾ ਹੋਏਗਾ ਹਾਂ ਜੇ ਆਪਾਂ ਤਾਂ ਤੇ ਵਿਸ਼ਰਾਮ ਲਈਏ ਕਿ ਸੁੱਚ ਹੋਵੇ ਤਾਂ ਉਹਦਾ ਭਾਵੇਂ ਆ ਵੀ ਸੁੱਚ ਤਾਂ ਹੀ ਹੋ ਸਕਦੀ ਹੈ ਜੇ ਸੱਚ ਪ੍ਰਾਪਤ ਹੋ ਜਾਵੇ ਏ ਗੁਰਮੁਖਾਂ ਦੀ ਜੀ ਹਾਂਜੀ ਬ੍ਰਾਹਮਣ ਚੂਲੀ ਸੰਤੋਖ ਕੀ ਗਿਰਹੀ ਕਾ ਸਤਿਦਾਨ ਰਾਜੇ ਚੂਲੀ ਨਿਆਵ ਕੀ ਪੜਿਆ ਸਤਿ ਧਿਆਨ ਹਾਂ ਜੇ ਬ੍ਰਾਹਮਣ ਬ੍ਰਾਹਮਣ ਦਾਨ ਲੈਂਦਾ ਹੈ ਛੱਡਦਾ ਬ੍ਰਾਹਮਣ ਦਿੰਦਾ ਕੀ ਹੈ ਆਪਣੀ ਚੂਲੀ ਬ੍ਰਾਹਮਣ ਸਨ ਦਿੰਦਾ ਕੀ ਹੈ ਬ੍ਰਾਹਮਣ ਸੰਤੋਖੀ ਬਣਾਉਂਦਾ ਆਪਣੇ ਸੰਤੋਖ ਦਾ ਰੋਲ ਮਾਡਲ ਜੀ ਹੈ ਬ੍ਰਾਹਮਣ ਹੈ ਜੀ ਲੈਂਦਾ ਉਹ ਨੂੰ ਕੁਝ ਪ੍ਰਾਪਤੀ ਬ੍ਰਾਹਮਣ ਜੁਲੀ ਸੰਤੋਖ ਕੀ ਬ੍ਰਾਹਮਣ ਸੰਤੋਖੀ ਹੋਣਾ ਚਾਹੀਦਾ ਸੰਤੋਖ ਦਾ ਰੋਲ ਮਾਡਲ ਹੋ ਕੇ ਉਹਨੂੰ ਮਿਚਲਣਾ ਦਾ ਦਾਨ ਕਰੇ ਸੱਚਾ ਸੱਚਾ ਦਾਨ ਕਰੇ ਦਸਾਂ ਨਾ ਉਹ ਕਰਕੇ ਦਾਨ ਕਰੇ ਚੋਰੀ ਕਰਕੇ ਦਾਨ ਨਾ ਕਰੇ ਠੀਕ ਦਾ ਹੈ ਆਪਣੀ ਦੇ ਕਮਾਈ ਦਾ ਦਾਨੇ ਕਰ ਸਕਵੇ ਉਹ ਦੇ ਕਮਾਈ ਦਾ ਦਾਨ ਕਰੇ ਔਰ ਬ੍ਰਾਹਮਣ ਸੰਤੋਖੀ ਹੋਵੇ ਅਰ ਸਤੋਗ ਦਾ ਰੋਲ ਮਾਰਦਰ ਹੋਵੇ ਉਰੂ ਦੇਖ ਕੇ ਉਹਦਾ ਜਿਹੜਾ ਗ੍ਰਿਹੀ ਹੈ ਉਹ ਵੀ ਸੰਤੋਖੀ ਬਣੇ ਦੇਖ ਕੇ ਮਹਿਜ਼ਦਾਨ ਸੰਤੋਖੀ ਸਮਝ ਲਓ ਪਕਤੀ ਹੋ ਗਈ ਉਹਦੀ ਸੰਤੋਖ ਤੱਕ ਪਹੁੰਚਾਤਾ ਹਾਂਜੀ ਜੇ ਚਾਹਦਾ ਭਾਪ ਕੀ ਬ੍ਰਾਹਮਣ ਜੋ ਹੈ ਉਹ ਗ੍ਰਿਹੀ ਨੂੰ ਲੁੱਟੇ ਨਾ ਸੰਤੋਖੀ ਬਣ ਕੇ ਦੱਸੇ ਉਹ ਜੇ ਜਿਆਦਾ ਦਵੇ ਨਾ ਰੈਡੀਕਲ ਨਹੀਂ ਲੈਣਾ ਮੈਂ ਤਾਂ ਮੈਂ ਜਰੂਰ ਮੇਰੇ ਤੁਸੀਂ ਬਾਲ ਰਾਜੇ ਚੂਲੀ ਨਿਆਮ ਕੀ ਪੜਿਆ ਸੱਚ ਧਿਆਨ ਰਾਜਾ ਜੇ ਉਹਵੇਂ ਉਹਦੀ ਚੂਲੀ ਹੈ ਕੀ ਹੈ ਰਾਜੇ ਤੇ ਚੂਲੀ ਕੀ ਛੜਾਈ ਜਾਂਦੀ ਹੈ ਤੇ ਸਾਫ ਕਰੂੰਗਾ ਹੁਣ ਸਾਫ ਕਰੂੰਗਾ ਮੈਂ ਠੀਕ ਹੈ ਜੀ ਸਾਰਿਆਂ ਦੇ ਕੋ ਯਾਰ ਰਾਜੇ ਚੂਲੀ ਨਿਉ ਕੀ ਰਾਜਾ ਤਾਹਿਆਂ ਜੇ ਸਾਫ ਕਰੇ ਸਾਰਿਆਂ ਨਾਲ ਨਿਉ ਕਰੇ ਸੱਚੇ ਕਹਿਣਾ ਦਵੇ ਹਰਗੀ ਪਰ ਇੱਥੇ ਤਾਂ ਰਾਜਿਆਂ ਪਰ ਰੋਜ਼ ਨਵੇਂ ਤੋਂ ਨਵਾਂ ਘਟਾਲਾ ਆਪਣੇ ਇੰਡੀਆ ਚ ਦਰਜ ਹੋਈ ਜਾ ਰਿਹਾ ਜੀ ਉਹ ਨਾਂ ਤੇ ਤਾਂ ਲਿਖਿਆ ਇਹ ਰਾਜੇ ਕਾਹਨੂੰ ਕਰਦੇ ਨੇ ਇਹ ਰਾਜੇ ਧੂ ਕਰਦੇ ਨੇ ਉਹਦਾ అవਤਾਰ ਬੰਦੇ ਦੇ ਤੇ ਰਾਜੇ ਜੂੜੀ ਨਹੀਂ ਤਾਂ ਹੀ ਹੋਊਗਾ ਕਾਹੂਗਾ ਰਾਜਾ ਜੇ ਜੂ ਕਰੂਗਾ ਪੜਿਆ ਸੱਚ ਧਿਆਨ ਪੜਿਆ ਸੱਚ ਧਿਆਨ ਪੜੇ ਨਹੀਂ ਜੂੜੀ ਕੀ ਹੈ ਜੇ ਉਹਦਾ ਧਿਆਨ ਸੱਚ ਨਾਲ ਜੁੜ ਜਵੇ ਆਤਮ ਤੇ ਆਹੀ ਹੋ ਜਵੇ पढ़ाई की है आत्म पे आना जोड़े पढ़ाई है आत्म चैंदी हो जवे आत्म दर्शी मुख पीता तिख जाए पानी पिता जगत का फिर पानी सब खाए पानी चितन पी पानी नाल बांधोड़ी तो ताज होगा के थोड़ी साफ होजूगा आप पानी नु पी लो चली जाती मुख पीता सिख जाए ਹੁਣਾ ਪਾਣੀ ਪੀ ਲੋ ਪਿਆਸ ਤੇ ਲੀ ਜਲਦੀ ਹੈ ਪਰ ਹਿਰਦਾ ਦੀ ਸਾਫ ਹੋ ਸਕਦਾ ਉਹਦੇ ਨੂੰ ਹਿਰਦੇ ਤੱਕ ਦਾ ਪਾਣੀ ਪਹੁੰਚਦਾ ਹੀ ਨਹੀਂ ਵੇਦੇ ਤੱਕ ਪਹੁੰਚਦਾ ਜਿਹਨੂੰ ਵੇਦੇ ਹਿਰਦੇ ਦਾ ਗਿਆਨ ਦੀ ਫੇਫੜੇ ਦਾ ਵੇਦੇ ਦਾ ਹਿਰਦੇ ਦਾ ਪਤਾ ਦੀ ਹੈ ਹਵਾ ਕਹਿੰਦੇ ਅਰਥਨ ਨੂੰ ਲੈ ਜਾਓ ਵਾਏ ਫਿਰ ਬਾਹਰ ਨੂੰ ਗੁਰੂ ਕਹੇਗਾ ਛੱਡ ਦੋ ਉਹਨਾਂ ਨੂੰ ਪੁੱਛੇ ਵੀ ਵੇਦਾ ਹਿਰਦਾ ਫੇਫੜਾ ਤੇਨਾਂ ਦਾ ਗਿਆਨ ਹੈ ਦੋ ਹਵਾ ਤਾਂ ਫੇਫੜੇ ਜਾਂਦੀ ਹੈ ਫੇਫੜੇ ਦੁਬਾਰਾ ਜਾਂਦੀ ਹੈ ਫਿਰ ਦੇਚ ਕਿੱਥੇ ਜਾਂਦੀ ਹੈ ਉਹ ਹਰਦੇ ਵਾਲੇ ਨੂਬ ਦੀ ਗੱਲ ਕਰੋ ਫੇਵਰੇ ਵਾਲੀ ਦੀ ਨਾ ਕਰੋ ਇਹਨਾਂ ਦੇ ਭਾਵਦੰਤਰ ਕੋਈ ਆ ਜਾ ਕੇ ਸਾਰੇ ਹਾਂਜੀ ਇਹ ਚੂਲੀ ਦਾ ਭਾਵ ਕੀ ਬਣਦਾ ਅਸਲ ਦੇ ਵਿੱਚ ਜਦੋਂ ਵੀ ਕੋਈ ਕਰਦਾ ਕੋਈ ਡਿਊਟੀ ਲੈਂਦਾ ਉਹ ਵਾਅਦਾ ਕਰਦਾ ਪ੍ਰਾਣ ਕਰਨਾ ਹੀ ਚੂਲੀ ਅੱਛਾ ਇੱਥੇ ਵੀ ਕੋਈ ਖਾਸ ਪ੍ਰੋਫੈਸਰ ਸਾਹਿਬ ਜੀ ਨੇ ਨਹੀਂ ਦੱਸਿਆ ਹੈ ਨਾਨਕ ਨਿਰਾ ਪਾਣੀ ਨਾਲ ਚੂਲੀਆਂ ਕੀਤੀਆਂ ਆਤਮਿਕ ਜੀਵਨ ਵਿੱਚ ਸੋਚ ਨਹੀਂ ਆ ਸਕਦੀ ਪਰ ਜੇ ਕੋਈ ਮਨੁੱਖ ਸੱਚੀ ਚੂਲੀ ਭਰਨੀ ਜਾਣ ਲਈ ਲਏ ਤਾਂ ਸੁੱਚੀਆਂ ਚੂਲੀਆਂ ਇਹ ਹਨ ਹੁਣ ਇਹ ਚੂਲੀ ਦਾ ਭਾਵ ਨਹੀਂ ਦੱਸਿਆ ਉਹ ਅਜੇ ਵੀ ਪਾਣੀ ਵਾਲੀ ਮੂੰਹ ਵਾਲੀ ਉਹ ਦੱਸ ਰਹੇ ਉਹ ਦਾ ਬਾਜ਼ਾਰ ਖੁੱਲਿਆ ਦੀ ਉਹ ਸੁਪਨੇ ਵਾਲੇ ਬਾਜ਼ਾਰ 'ਚ ਨਹੀਂ ਬਾਜ਼ਾਰ 'ਚ ਨਹੀਂ ਆਏ ਜਾਗਦਾ ਵਿਚਾਰ ਹੋਰ ਹੁੰਦਾ ਸੁਪਨੇ ਵਾਲਾ ਵਿਚਾਰ ਹੋਰ ਹੁੰਦਾ ਵੈਸੇ ਸ਼ਬਦ ਚੱਚੇ ਨੂੰ ਸਿਰਫ ਬਣਦਾ ਵੈਸੇ ਚੂਲੀ ਤਾਂ ਨਹੀਂ ਬਣਦਾ ਹੈ ਜੀ ਚੁੱਲੀ ਚੁਲੀ ਪੜਨਾ ਚਾਹੀਦਾ ਸੀ ਹੈਨਾ ਓਕੜਾ ਚੁੱਲੀ ਉਹ ਕਹਿੰਦੇ ਨੇ ਜੋੜੀ ਦੀ ਅੱਛਾ ਪਰ ਆਪਾਂ ਆਮ ਦੇਸੀ ਭਾਸ਼ਾ ਜੀ ਨੂੰ ਚੂਲੀ ਕਹਿ ਦਿੰਦੇ ਹਾਂ ਜੀ ਅਜੇ ਜੋੜ ਦਾ ਵੱਜੇ ਦੀ ਹੁੰਦੀ ਹੈ ਠੀਕ ਹੈ ਆਹ ਹੁੰਦੀ ਹੈ ਜਿੱਥੇ ਜਿੱਥੇ ਆਪਾਂ ਚੂਲੀ ਪੜੀ ਹੈ ਉਹਦਾ ਭਾਵ ਅਸਲ ਚ ਚੁੱਲੀ ਹੈ ਅਸਲੀ ਸ਼ਬਦ ਚੁੱਲੀ ਹੈ ਚੁੱਲੀ ਦਾ ਭਾਵ ਹੈਗਾ ਪ੍ਰਾਣ ਹੈ ਜੀ ਹਾਂ ਜੀ ਠੀਕ ਹੈ ਇਹਦੇ ਬਾਰੇ ਦੱਸੋ ਜੀ ਪਾਣੀ ਪਿਤਾ ਜਗਤਕਾ ਫਿਰ ਪਾਣੀ ਸਭ ਖਾਈ ਸਰੀਰ ਪਾਣੀ ਦਾ ਬੁਲਬੁਲਾ ਹੈ ਇਹ ਬੁਲਬੁਲਾ ਪੈਦਾ ਹੁੰਦਾ ਉਹ ਪਾਣੀ ਜੋ ਜਿਹੇ ਬੁਲਬੁਲਾ ਸਮਾਉਂਦਾ ਹੋਊਗੀ ਪਾਣੀ ਚ ਐਸੇ ਠੀਕ ਹੈ ਉੱਤੇ ਦਾ ਭਾਵ ਅਸਲ ਚ ਸਰੀਰ ਹੀ ਹੈ ਹਾਂ ਸਰੀਰ ਹੈ ਜੀ ਠੀਕ ਹੈ ਜੜਦੀ ਗੱਲ ਹੋ ਗਈ ਹੈ ਹਾਂ ਜੀ ਸਿੱਧੀ ਹੈ ਰਿੱਧੀ ਪਿੱਛੇ ਆਵੇ ਨਾ ਸੁਣੀਏ ਨਉ ਨਿddੀ ਮਿਲੇ ਮਨ ਚਿੰਦਿਆ ਫਾਵੈ ਜੇ ਨਾਮ ਨਾਮ ਜੀ ਨੂੰ ਕਹਦੇ ਤਿੰਨ ਲੋਕ ਨਾਮ ਨੂੰ ਸੁਣਨ ਨਾਲ ਹੋਇਆ ਤਿੰਨ ਲੋਕ ਦਾ ਗਿਆਨ ਨਾਮ ਸੁਣਾਉਣ ਵਾਲਿਆ ਨੂੰ ਹੈ ਦੇਣ ਵਾਲਿਆ ਨੂੰ ਨਹੀਂ ਸੁਣਨ ਵਾਲਿਆ ਨੂੰ ਕੀ ਹੋਣਾ ਨਾਮ ਨਾਲ ਇੰਨੀਆਂ ਸ਼ਰਤਾਂ ਲਾਈ ਹੋਈਆਂ ਨੇ ਗੁਰਬਾਣੀ 'ਚ ਫੇਰ ਵੀ ਪਤੰਦ ਦੱਬੀ ਜਾਂਦੇ ਨੇ ਉਹ ਪਰਵਾ ਨੀ ਕਰਦੇ ਉਹ ਤਾਂ ਕਹਿੰਦੇ ਵੀ ਨੌ ਜਪਣ ਨਾਲ ਮੱਥੇ ਤੇ ਲਾਈਟ ਨਿਕਲਦੀ ਹੈ ਜੀ ਫੇਰ ਤਾਂ ਬਿਜਲੀ ਦੀ ਠੀਕ ਹੈ ਜੀ ਹਾਂ ਜੀ ਜਿਆਦਾ ਰਾਤ ਨੂੰ ਸੂਰਜ ਚੜ੍ਹ ਸਕਦਾ ਹੈ ਜੀ ਹੋਏ ਜੀ ਮਾਇ ਸੁਣੀਏ ਸਭ ਸਿੱਧੀ ਹੈ ਰਿੱਧੀ ਪਿੱਛੇ ਆਵੇ ਰਿੱਧੀ ਮਾਇਆ ਪਿੱਛੇ ਲੱਗੀ ਫਿਰਦੀ ਹੈ ਫਿਰ ਤਿੰਨ ਲੋਕ ਦਾ ਗਿਆਨ ਹੋ ਜਾਂਦਾ ਮਾਇਆ ਤਾਂ ਅਗਲੇ ਉਹੀ ਨਹੀਂ ਫਿਰਦੇ ਨੇ ਪਿੱਛੇ ਪਿੱਛੇ ਰਿੱਧੀ ਅਲੀ ਨਾ ਸੁਣੀਏ ਨਾ ਨਿੱਦੀ ਮਿਲੈ ਮਨ ਚਿੰਦਿਆ ਪਾਵੈ ਨਾ ਸੁਣੀਏ ਕੁਰਬਾਨੀ ਦੇ ਨਾਮ ਸਮਾਇਆ ਹੋਇਆ ਸਮਝ ਆ ਜਾਵੇ ਨਾ ਜੇ ਗੁਜਾਰਤ ਗੁਜਲੀ ਹੈ ਦੇ ਵਿੱਚੋਂ ਦੇਖਿਆ ਸੁਣ ਲਈਏ ਜਿਆ ਸੁਣ ਲਈਏ ਨਾ ਜਿਹੜਾ ਬਿਲਾ ਕਰਨਾ ਤੇ ਸੁਣਨ ਵਾਲਾ ਹੈ ਨਾ ਨਿੱਦੀ ਮਿਲੈ ਖਜ਼ਾਨਾ ਮਿਲ ਜਾਂਦਾ ਦੂਆ ਖਜ਼ਾਨਾ ਨਾ ਇੱਥੇ 9000 ਦਾ ਨਾਮ ਕਿਉਂ ਹੈ ਕੀਤਾ ਹੋਇਆ ਇੱਥੇ ਹੈ ਵਿਆਹ ਕਰਨ ਦੇ ਹਿਸਾਬ ਨਾਲ ਤੇ ਦੇਨੂ ਸਿਆਰੀ ਹੈ ਹਾਂਜੀ ਜਿੱਦੀ ਜਦ ਇੱਕ ਵਜਨ ਦਾ 9000 ਤੋਂ 9 ਕਿਵੇਂ ਹੋ ਜਾਊਗਾ 9 ਨਿੱਡੀਆਂ ਹੀ ਕਹਿੰਦੇ ਆਪਾਂ 9 ਨਿੱਡੀਆਂ ਦਾ ਜਿੱਥੇ ਲੋੜ ਉਹ ਤੇ ਸਿੱਧੀਆਂ ਹਾਂਜੀ ਇੱਥੇ ਤਾਂ ਨਿੱਡੀ ਇੱਕ ਵਜਨ ਦਾ ਵਿਆਹ ਕਰਨ ਪਿਆ ਸੀ ਇੱਥੇ ਵਿਆਹ ਕਹਿੰਦੀ ਇੱਕ ਵਜਨ ਦੀ ਸਿੱਧੀ ਸਿਆਰੀ ਲੱਗੀ ਹੋਈ ਹੈ ਹਾਂਜੀ ਉਹ ਕਹਿੰਦੇ ਰਿੱద్ధి ਸਿੱਧੀ ਰਿੱద్ధి ਕਰਾਮਾਤੀ ਤਾਕਤਾਂ 9 ਨਿੱਡੀ 9 ਖਜ਼ਾਨੇ ਭਾਵ ਜਗਤ ਦੇ ਸਾਰੇ ਪਦਾਰਥ ਨਾ ਦਾ ਮਦਰ ਵੀ ਨਿਊ ਹੈ ਦੋ ਪੰਨੋ ਜੀ ਨਵਾਂ ਖਜ਼ਾਨਾ ਮਿਲਦਾ ਨਵਾਂ ਖਜ਼ਾਨਾ ਗਿਆਨ ਦਾ ਨਵਾਂ ਹੁਣ ਕਿਸੇ ਟੀਕੇ ਚ ਨਹੀਂ ਹੈ ਇਹ ਕਿਤੇ ਪ੍ਰਚਾਰ ਸਿੱਧੀ ਆ ਨਿਕਲਦੀ ਹੈ ਨਵੀਂ ਸੀ ਹੁਰਬਾਨੀ ਤੇ ਮੇਰਾ ਨਹੀਂ ਤਲਬ ਠੀਕ ਉੱਥੇ ਨਵਾਂ ਹੀ ਕਹਦਾ ਨੌਂ ਨਿਬਦਾ ਮਦਲਵਾ ਨਵਾਂ ਖਵਾਂ ਖਜ਼ਾਨਾ ਹੈ ਗਿਆਨ ਦਾ ਸੰਸਾਰ ਨਹੀਂ ਹੈਗਾ ਨਵਾਂ ਖਜ਼ਾਨਾ ਮਾਣ ਕੇ ਨਿਆ ਪਾਵੋ ਜੋ ਮਨ ਦੇ ਵਿੱਚ ਇੱਛਾ ਸੀ ਪ੍ਰਾਪਤ ਹੋ ਗਈ ਨਾ ਸੁਣਿਆ ਸੰਤੋਖ ਕਬਲਾ ਚਰਨ ਆਵੇ ਨਾ ਸੁਣਿਆ ਸੰਤੋਖ ਹੋਵੇ ਦੇ ਸੁਣਨਾ ਗੁਰਬਾਣੀ ਸੰਤੋਖ ਹੋ ਜਾਂਦਾ ਓਏ ਕਬਲਾ ਕਰਨ ਤੇ ਆਵੇ ਸੰਤੋਖ ਹੋ ਜਾਂਦਾ ਉਹ ਅੰਦਰ ਧਿਆਨ ਹੋ ਜਾਂਦਾ ਆਪਣੇ ਹਿਰਦੇ ਨਾਲ ਚੜ ਜਾਂਦਾ ਆਤਮ ਸਤਿ ਹੋ ਜਾਂਦਾ ਆਤਮ ਧਿਆਨ ਕਬਲਾ ਆਪਣੇ ਹਿਰਦੇ ਵਿੱਚ ਧਿਆਨ ਹੋ ਜਾਣਾ ਅੰਤ ਤੇ ਆ ਨੋਜੰਦਾ ਹੁੰਦਾ ਉਹ ਅੰਤ ਤੇ ਆਂਦਾ ਵਰਤ ਤੇ ਆਣੀ ਨਾ ਨਾ ਤਿਰਕੁੱਟੀ ਛੱਡ ਲੈਂਦਾ ਹੋ ਦਸਵਾਂ ਦਵਾਰੋਂ ਦਾ ਖੁੱਲ ਜਾਂਦਾ ਤਾਂ ਤੋਖੀ ਦਾ ਦਸਵਾਂ ਦਵਾਰ ਖੁੱਲ ਜਾਂਦਾ ਕਮਲਾ ਚਰਨ ਕੀ ਹੈ ਜੀ ਕਿਸੇ ਗੁਰਦੇ ਚੜਨ ਬਸੇ ਠੀਕ ਹੈ ਜੀ ਨਾ ਸਹਿਜ ਊਪਜੈ ਸਹਿਜੇ ਸੁਖ ਪਾਵੈ ਗੁਰਮਤੀ ਨੋ ਪਾਈਐ ਨਾਨਕ ਗੁਣ ਗਾਵੈ ਨਾ ਸੁਣੀ ਸਹਜ ਉਪਜਾਇ ਸੁਣੀ ਤੇ ਬਹੁਤ ਧਿਕ ਜਾਂਦਾ ਸਹਜ ਉਪਜਾ ਤਾਂ ਹੀ ਅੰਦਰ ਧਿਆਨ ਹੋਇਆ ਸਹਜ ਬਹੁਤ ਧਿਕਿਆ ਹੋਇਆ ਉਹਦਾ ਅੰਦਰ ਤੇ ਅਧਿਨਾਮਨ ਧਿਕਿਆ ਹੁੰਦਾ ਸੁਖ ਪਾਦਾ ਸੁਖ ਹੈ ਉਹਨੂੰ ਜਾਗਦੇ ਨੂੰ ਸੁਖ ਹੁੰਦਾ ਸੁਪਨੇ ਚ ਦੁੱਖ ਹੁੰਦਾ ਸੁਪਨੇ ਉਲਟੇ ਫੁਲਟੇ ਆਉਂਦੇ ਨੇ ਉਹ ਸੁਪਨਾ ਆਉਦਾ ਹੀ ਨਹੀਂ ਕੋਈ ਮਰਤੇ ਨਾ ਨਾਨਕ ਗੁਣ ਗਾਵੈ ਇਹ ਨਾ ਮਿਲੂਗਾ ਹੁਣ ਤੇ ਬੇਰਦਲ ਤੇ ਗੁਰਮਤਿ ਤੋਂ ਮਿਲਣਾ ਗੁਰਬਾਣੀ ਦੀ ਸੋਚੀ ਹੀ ਨਾਮ ਸੁਣ ਲਈ ਨਾ ਮੁਰਬਾਣੀ ਸਮਝ ਲਈ ਅਸਲ ਬਿਨਾਂ ਸਮਝੇ ਤੇ ਸੁਣੀ ਉਹ ਦੀ ਜੇ ਸਮਝ ਨਹੀਂ ਆਈ ਤਾਂ ਧੂਰੇ ਵੀ ਕੀ ਨਾਨਕ ਤਾਂ ਕੇਵਲ ਗੁਣ ਗਾਇਨ ਕਰ ਰਿਹਾ ਗੁਰਮਤਿ ਗੁਰ ਕੀ ਮਤੂ ਹੋਏ ਆਣੇ ਫਗਦੇ ਨਾਮ ਉਹ ਦੂਬੇ ਸਿਆਣੇ ਗੁਰ ਕੀ ਬਾਤ ਲੈਣਾ ਹੀ ਕਰਨੀ ਆ ਭਗਤੀ ਕਰ ਤੇ ਨਾ ਮਿਲਣਾ ਉਹ ਹੀ ਕਿਰਪਾ ਕਰੋ ਹਰੇ ਠੀਕ ਤਾਂ ਨਾ ਬੁਝ ਪ੍ਰਾਪਤੀ ਹੈ ਹੈ ਗੁਰਮਤਿ ਚੋਂ ਹੀ ਪ੍ਰਾਪਤੀ ਹੁੰਦੀ ਹੈ ਬਾਕੀ ਨੌ ਤਾਂ ਹੋਰ ਹੈ ਗੁਰਮਤਿ ਨੌ ਜਿਹੜਾ ਹੈ ਉਹ ਗੁਰਮਤਿ ਚੋਂ ਹੀ ਪ੍ਰਾਪਤ ਹੋਣਾ ਹੈ ਜੀ ਗੁਰਮਤਿ ਪ੍ਰਾਪਤ ਹੋਣਾ ਜਿਹੜੇ ਨਾਮ ਦੀ ਗੱਲ ਚੱਲੀ ਆ ਗੁਰਮਤਿ ਵਾਲਿਆਂ ਨੂੰ ਇਹ ਗ ਨਹੀਂ ਅਸੰਖ ਨਾਮ ਤਾਂ ਹੈ ਦੁਨੀਆ ਵਿੱਚ ਪਹਿਲਾਂ ਹੀ ਆ ਵਧੇਰੇ ਠੀਕ ਹੈ ਜੀ ਏਥੇ 7ਵੀਂ ਪੌੜੀ ਸਮਾਪਤੀ ਹੈ ਜੀ